आले दक्कणे मोहल्ला 5वा जेतू मित्र असाडडा इक पूरी ना विशोड़ जिओ महेंदा कौ मोहिया कण पसि जानी तो, तो। आ ये तो मेरा सजन है ਇਹ ਤੋਂ ਬਿਤਰ ਪਸਾੜੜਾ ਇੱਕ ਭੋਲੀ ਦਾ ਵਿਚੋੜ ਇੱਕ ਮਿਲੂ ਇੱਕ ਪਲ ਜਿੱਦੀ ਵੇਦ ਵੀ ਬਦਲੂ ਨਾ ਵਿਚੋੜ ਇੱਕ ਪਲ ਵੀ ਮੈਂ ਤੂੰ ਆਪ ਤੋਂ ਅਲੰਦ ਲੁਕਾ ਜਿਉਂ ਮੈਂ ਰਜਾ ਤਾ ਹੋਇਆ ਜੇ ਤਰੀ ਕਿਹਨਾ ਤਵੇ ਨੂੰ ਹੋਣਿਆ ਹੈ ਕਦ ਭੱਤੀ ਜਾਂਦੀ ਤੋਹਰੇ ਤੋਹਨੀ ਮੈਂ ਤੇਰੇ ਦਰਸ਼ਨ ਕਦੋਂ ਕਰੂੰ ਜਿਦ ਤੀ ਕਰਨਾ ਤੈਨੂੰ ਪਰਬਤ ਗੋਲੇ ਤੇ ਜੋ ਉਹ ਮੇਰਾ ਪਹੇਜੇ ਤਬੂ ਜਲਦੀ ਤੋਂ ਜਲਦੀ ਤੇਰਾ ਦਰਸ਼ਨ ਚਾਹੀਦਾ ਹੈ ਜੇਕਰ ਜਿੰਦ ਵੀ ਜੇ ਨਾਲ ਕੋਈ ਬਿਛੋੜੇਗਾ ਤਾਂ ਜਲਦੀ ਦਰਸ਼ਨ ਹੋਊਗਾ ਜੀ ਕਹੀ ਵੇ ਛੋੜ ਲੈ ਕੇ ਆਇਆ ਨਾਲ ਨਹੀਂ ਹੈ ਲਾਂ ਨਾਲ ਹੈ ਵੇ ਛੋੜ ਇੱਕ ਭੋਰੀ ਇੱਕ ਨਾ ਵੇ ਛੋੜ ਆਹ ਤੇ ਨਾ ਕਰੀ ਦੁਰਜਨ ਤੂੰ ਜਲ ਪਹਾੜੀ ਵੀ ਛੋੜੇ ਮਰ ਜਾ ਦੁਰਜਨ ਤੂੰ ਚੱਲ ਪਹਾੜੀ ਛੋੜੇ ਬੁਰਾ ਜਾਹੀ ਉਲਾਹਾ ਇਹ ਦੋ ਜੁੜੂ ਤੂੰ ਚੱਲ ਪਾਹੜੀ ਤੂੰ ਦਾ ਜਿਹੜਾ ਜੰਦੀ ਦੁਦੀ ਹੈ ਇਹਦੀ ਇੱਛਾ ਕਰੂ ਤਰਤਾ ਵੀ ਕਰ ਬੜੀ ਤੇ ਬਰੁਬਲੇ ਦੀ ਇੱਛਾ ਛੋੜੇ ਨਾ ਜਾ ਇਹ ਤੱਕ ਤਾਂ ਮਰ ਤੂੰ ਤਾਂ ਗੱਲ ਚੜ੍ਹਣ ਵਾਲੀ ਹੋਈ ਹੈ ਜੰਤੇ ਮਿਲਦੀ ਤੂੰ ਰਹਿ ਸਕਦੀ ਅੰਤਾਂ ਨੂੰ ਸੋ ਤੇ ਜਿਹੜੀ ਆਪੋ ਦੁੱਖ ਉਲਾਹੇ ਕੱਪੀਏ ਦਾ ਤਾਸੂ ਜੇ ਜੜੀ ਤੇ ਸੋ ਜਾ ਇੱਕ ਕਰਕੇ ਮੇਰਾ ਸਾਰੇ ਦੁੱਖ ਜਿਹੜਾ ਹੈਗਾ ਪੂਰ ਹੋ ਜੂ ਮੈਜਵੇ ਇੱਥੇ ਪੂਜਾ ਫਿਰ ਦੇ ਕੇ ਸੋ ਜਾ ਤੂੰ ਜਲ پہاੜੀ ਕੀ ਭਾ ਬੰਦ ਮਾਇਆ ਨਹੀਂ ਭੁੱਖ ਲੈਂਦੀ ਹੈ ਮਾਇਆ ਹੀ ਭੀ ਦਿੰਦੀ ਉਹ ਜਾਂਦੀ ਹੈ ਮਾਇਆ ਜਿਹੜੀ ਹਿਰਦਾ ਛੱਡ ਕੇ ਕਿਤੇ ਜਾਂਦਾ ਕੀ ਪੰਜੀਆਂ ਜਿਹੜੇ ਗਿਆਨੰਦ ਦੇ ਸਾਂਦਰ ਕਾਇਕ ਤੁਰੀ ਬਾਸਾ ਦੇ ਚੋਗਵੇ ਭੀਤ ਕਰਾਰੀ ਜੇ ਬਾ ਤੇਰਾ ਘਰਵਾਰ ਜਾਂ ਪਹਿ ਗਏ ਕੀ ਰੇ ਮਨ ਨੂੰ ਦੁਰਜਨ ਕੇ ਲੁਗਿਆ ਗੁੱਦੀ ਦੂ ਦੂ ਜਨ ਪਹਾੜੀ ਅਗਲ ਵਾਜੀਆ ਗਿਆ ਲਫਜ਼ ਵਿਆਹੀ ਨਾਲ ਉਹ ਇੱਕ ਦਿਮਾਗ ਦੇ ਬੀਤੀ ਰਿਦੇ ਤੂੰ ਮੇਰਾ ਜੀ ਬਾਈ ਬਾਹਰ ਕੰਤਾ ਤੂੰ ਸੋ ਸੇਜੜੀ ਹੁਣ ਕੰਤਾ ਜੀ ਗੁੱੜ ਅੱਛਾ ਇਹ ਕਿਹੜੀ ਸੇਜ ਤੇ ਸੌਵੇਂ ਹੁਣ ਫੇਰ ਜੀ ਅੱਛਾ ਤੂੰ ਸੌ ਸੇਜੜੀ ਰਾਖੀ ਬੈਠੂ ਅੱਛਾ ਹੁਣ ਪਹਿਲਾਂ ਬਾਹਰ ਗਈ ਹੋਈ ਐ ਜੀ ਜਦੋਂ ਦੁਰਜਨ ਫੇਰ ਮਾਤਾ ਬਾਹਰ ਚਾੱਕ ਕੇ ਦੇਖ ਰਹੀ ਮੈਂ ਪਰਫੇਕ ਕੰਤਨੂ ਕਿਉਂ ਕਹਿੰਦੀ ਵੀ ਤੂੰ ਸੇਜੜੀ ਤੇ ਸੌਂ ਤਾਂ ਕਰ ਤਾ ਪਹਿਲਾਂ ਹੀ ਅੰਦਰ ਹੀ ਸੀ। ਮੈਂ ਤੂੰ ਕਹਿ ਤਾ ਨੂੰ ਹੌਣ ਕਰ ਤੂ ਵੀ ਤੂੰ ਬਿਨਾਂ ਆਲੇ ਸਮਝਾ। ਹੋਰ ਪਾਸੇ ਉਤਰ। ਤੇ ਤੇਰਾ ਦੇਖਣ ਤਾਂ ਕਿਹੜਾ ਦਾ ਤੈਨੂੰ ਖੋ ਜੂ। ਪਰ ਪਤਾ ਚੱਲ ਨਹੀਂ ਹੋਇਆ ਹੁਣ ਪਤਾ ਸੀ ਆ ਬੜਿਆ ਸਭ ਦੀ ਜਿਹੜੀ ਟਾਰਚ ਸੀ ਲਾਈਟ ਵਾਸਤਾ ਦਿੰਦੀ ਸੀ ਕਾਬੂ ਉਹ ਲੈ ਕੇ ਘਾੜਾ ਸੀ ਤਾਂ ਦਾ ਬੋਲਟੇਜ ਵੀ ਗਿਆ ਰਜਾਣਾ ਉਹ ਬੈਟਰੀ ਨਾ ਉਹ ਵੀ ਬੈਟਰੀ ਦੀ ਲੋੜ ਨਹੀਂ ਉਹਨਾਂ ਤੇ ਗਿਆਨ ਦੀ ਲੋੜ ਨਹੀਂ ਰਹੀ ਅੰਦਰ ਉਹ ਬੱਚਾ বিছড়া হম মে রোগ सज्जन सच्चा पाछा जिस मिल पीछे पो पुरजन दूजा भाव है बोढ़ण की है दूजा को दूजी पुखाय दी पोखत हो जन बिछड़ा हो मैं रोग बिछड़ा ना ना हो गया रोग इच्छा है भाया दी चाहोगे वैसे कर दे कर ना दिन मो होर लौट दिए ईदी लोड ਤੇ ਉਹਦੇ ਜੁੜਾ ਹੋਵੇ ਲੋ ਸੱਜਣ ਸੱਚਾ ਬਾਖਿਆ ਜਿਸ ਦਿਲ ਜੀਜਾ ਕੋ ਸੱਜਣ ਸੱਚਾ ਬਾਖਿਆ ਜਿਹਦੇ ਦਿਲ ਕੇ ਕੋ ਕਲ ਦਾ ਕਾਦਾ ਜਾਂਦੋ ਤੇ ਚਾਰਵੇਂ ਉਹਦੇ ਨਾਲ ਬੈਠ ਕੇ ਖੁਰਾ ਬੀਆ ਹੋਵੇ ਇਹ ਤਾਂ ਪ੍ਰਾਪਤ ਹੋਵੇ ਦਰਘਜੂ ਸਕੇ ਤਾਂ ਉਹ ਉਹੀ ਖਾਵੇ ਆ ਪ੍ਰਾਪਤ ਹੋਤਾ ਸਦ ਗੋਤੂ ਉਹ ਤਾਂ ਕੇ ਖਾਵੇ ਜੋ ਖਾਵੇ ਤੂੰ ਅਗੰਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੂੰ ਸਿਰਜਿਆ ਸਭ ਸੰਸਾਰ ਤੂੰ ਨਾਇਕ ਅਸਾਗਲ ਪਾਉ ਤੂੰ ਅਗੰਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੇਰੀ ਕੀਮਤ ਨਹੀਂ ਕੋਈ ਕਹਿ ਸਕਦਾ ਤੂੰ ਤੇ ਸਿਰਜਿਆ ਸਾਰਾ ਸੰਸਾਰ ਸਿਰਜਿਆ ਤੂੰ ਨਾਇਕ ਅਸਾਗਲ ਪਾਉਣ ਸਾਰੇ ਫਿਰਦੇ ਆ ਬਿਖੇਲਣ ਵਾਲੇ ਸਾਰੇ ਕੰਡਾ ਆਪੇ ਜੀ ਤੂੰ ਹੀ ਖੇਲਦਾ ਸਾਰੇ ਭਵਨ ਦਾ ਤੂੰ ਆਇਆ ਤੈਨੂੰ ਕਿਹਾ ਜੀ ਪਰਮੇਸ਼ਰ ਵਾਸਤੇ ਕਿ ਹੈ ਜੀ ਵਾਸਤੇ ਕਿ ਹੈ ਤੂੰ ਸਿਰਜਿਆ ਸਭ ਸੰਸਾਰ ਇਹਨੇ ਸੰਸਾਰ ਕਿਵੇਂ ਸਿਰਜਿਆ ਜੀ ਜੀਵ ਨੇ ਆਪ ਵੜ ਕੇ ਦਾ ਤਾਣ ਸਰਜੋਇ ਪਰਮਾਤੀ ਕੀਤੀ ਹੈ ਸੰਸਾਰ ਆਪ ਆਇਆ ਆਪ ਦੀ ਵੜਿਆ ਸਿਰਜੋਈਆਂ ਪਰ ਠੀਕ ਲਿਖਾ ਪੈਂਦਾ ਵੀ ਸ਼ਾਇਦ ਪਰਮੇਸ਼ਰ ਦੀ ਅਲੇਪ ਉਹਨਾਂ ਨੇ ਵਿੱਚੋਂ ਆਪ ਐ ਕਿ ਜਿਹੜੇ ਜੀ ਸਾਰੇ ਲੋਕ ਦੇ ਜਿਹਨਾਂ ਲੋਕਾਂ ਤੋਂ ਬਾਹਰੋਂ ਉਹਨਾਂ ਨੂੰ ਕੀ ਲੋਕ ਜਿਵੇਂ ਹੰਸ ਪੁੱਛਿਆ ਨਹੀਂ ਬਗਲੇ ਦੀ ਪੁੱਛ ਹੋ ਗੱਲ ਐ ਈ ਬਗਲਾ ਦੁਨੀਆਂ ਵਿੱਚ ਬਗਲੇ ਦੀ ਪੁੱਛਾ ਹੰਸ ਹੁੰਦਾ ਕੋਈ ਨਹੀਂ ਕੋਈ ਦੀ ਬਗਲਾ ਹੀ ਹਸਕਾ ਆ ਰਹੇ ਬਗਲਾ ਹੀ ਹਸ ਬਣੇ ਬੈਠਾ ਠੀਕ ਹੈ ਜੀ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਤਗਲ ਰੌਣ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਤਗਲ ਰੌਣ ਜੇ ਕਾਹਰੇ ਇਹ ਸਤਗਲ ਜੇ ਰੌਣ ਨੇ ਰਾਵਣ ਦੇ ਤੇਰੇ ਤੇਰੇ ਵਿੱਚ ਪੈਲਾ ਹੋਇਆ ਮੇਰੀ ਕੋਦਪੜ ਕੋਈ ਨਾ ਸਕੈ ਤੂੰ ਅਗਨਾਸ਼ੀ ਉਧਾਰ ਕਰਨ ਵਾਲਾ ਅਗਨਾਸ਼ੀ ਤੂੰ ਜਾਗਣੂ ਤਾਂ ਜਾਗਦਾ ਉਦਾਰ ਕਰਨ ਵਾਲਾ ਹੈ ਬਨਾਸੀ ਹੈ ਆਪ ਨੂੰ ਰੂਪਿਆ ਜਾ ਸਕਦਾ ਹਾਂ ਜੀ ਤੂੰ ਥਾਪੇ ਚਾਰੇ ਯੁਗ ਤੂੰ ਫਿਰਤਾ ਸਗਲ ਧਰਣਾ ਆਵਣ ਜਾਣਾ ਕੀਆ ਤੂੰ ਨਾ ਲੱਗੇ ਤ੍ਰਣ ਥਾਪੇ ਚਾਰੇ ਯੁਗ ਚਾਰੇ ਯੁਗ ਥਾਪੇ ਤੂੰ ਕਰਤਾ ਸਗਲ ਧਰਣਾ ساری ਧਰਤੀ ਦਾ ਕਰਤਾ ਤੂੰ ਤੂੰ ਆਵਣ ਜਾਣਲ ਕੀਆ ਤੂੰ ਹਰ ਜਾਣਲ ਕੀਆ ਤੂੰ ਤਾਂ ਲੈਤਨ ਲੱਗੇ ਤਣ ਤੇ ਰੁਕੇ ਰਹਿ ਤਣ ਤੇ ਨਾ ਵੀ ਨੇਪੜੀ ਲੱਗਦਾ ਮਾਇਆ ਦਾ ਕਹਤ ਦੀ ਇਹ ਪੋਜੀਸ਼ਨ ਹੋ ਜਾਂਦੀ ਆ ਫਿਰ ਉਹ ਸੱਚਖੰਡਾਰ ਇਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਕਰਤੇ ਕਿ ਬਿਧ ਕਰਤਾ ਜਾਣਾ ਕਹਿ ਜਾਂਲ ਕੋਈ ਬਣ ਜਾਂਦਾ ਫਿਰ ਰੁਕੇ ਜਾ ਕੇ ਇਹ ਪੋਜੀਸ਼ਨ ਝਾਕੇ ਸੱਚਖੰਡ ਦੇ ਨਾਲ ਹੀ ਰਣ ਕੇ ਸਭ ਕੰਮ ਉਹ ਕਰਦਾ ਉਹ ਉਹ ਕਰਦਾ ਇਕ ਕੋਲ ਨਾਲ ਹੋ ਜਾਂਦੀ ਹੈ ਇੱਕ ਹੋ ਜਾਂਦੀ ਹੈ ਸਾਰਿਆਂ ਦੀ ਹਾਂਜੀ ਤੁਨੇ ਥਾਪੇ ਚਾਰੇ ਯੁਗ ਇਹ ਪਰਮੇਸ਼ਰ ਨੇ ਨਹੀਂ ਥਾਪੇ ਚਾਰੇ ਯੁਗ ਕੇ ਇਹ ਨਹੀਂ ਥਾਪੇ ਥਾਪੇ ਚਾਰੇ ਜੋਤ ਨੇ ਪੂਰਨ ਜੋਤ ਨੇ ਥਾਪੇ ਪੂਰਨ ਜੋਤੇ ਹੀ ਵੜ ਗਿਆ ਪੂਰਨ ਜੋਤ ਨੇ ਆਪਣੀ ਇੱਛਾ ਨਾਲ ਥਾਪੇ ਨੇ ਆਪਣੇ ਹੁਕਮ ਨਾਲ ਥਾਪੇ ਨੇ ਤੂੰ ਜਾਣਾ ਕੀ ਜਾਣਾ ਕੌਣ ਕਰ ਰਿਹਾ ਆਪਾਂ ਜਾਣੇ ਕਿਤੇ ਪੂਰਨ ਜੋਤ ਲਈ ਆਇਓ ਕਰ ਰਿਹਾ ਉਹ ਹੋ ਰਿਹਾ ਆਪਣੇ ਨਾਲ ਲੇਪ ਕਿਨੂੰ ਨਹੀਂ ਲੱਗ ਰਿਹਾ ਤੂੰ ਤੇ ਲੇਪ ਨਾ ਲੱਗਿਆ ਤਰਣ ਇੱਕ ਲੇਪ ਨਹੀਂ ਲੱਗਦਾ ਅੱਧੇ ਨੂੰ ਲੇਪ ਲੱਗਦਾ ਜੇ ਦਾ ਅੱਧਾ ਅੱਧੇ ਨੂੰ ਦਾ ਹੈ ਜਿਸ ਹੋਵੇ ਆਪਦੇ ਹਾਲ ਤੇ ਸਲਾਵ ਸਤਗੁਰ ਚਰਨ ਤੇ ਹੋਵੇ ਆਪਦੇ ਹਾਲ ਤੇ ਸਲਾਵ ਸਤਗੁਰ ਚਰਨ ਜਿਹਦੇ ਤੇ ਆਪ ਕਿਰਪਾ ਕਰੇ ਭIAL ਹੋ ਜਵੇ ਸੂਤ ਸਾਧਗੋਲ ਤੇ ਕੈਨਲ ਜੋੜ ਦਿੰਦਾ ਤੂੰ ਹੋਰ ਉਪਾਏ ਨਾ ਲੱਭੀ ਆਪਣਾ ਦੀ ਲੋੜ ਨਹੀਂ ਤੈਨੂੰ ਇਥੇ ਛਿੜਕਾ ਦੇ ਦੇ ਡੇਰਾ ਬਣੂਰ ਦੀ ਲੋੜ ਨਹੀਂ ਹੈ ਆਪਣਾ ਕੀ ਤੁ ਲੱਭ ਲਈ ਇਹਨੇ ਸਿੱਖ ਪੜਾਈ ਆ ਉਹ ਆਪਣਾ ਕੀ ਲੱਭਣਾ ਉਹ ਆਪਣੀ ਦੁਧ ਰਹੀ ਹੈ ਕੋਈ ਨਾ ਲੱਭੀ ਨਮੇਰਾਲ ਨਾ ਲੱਭੀ ਜਿਵੇਂ ਨਮੇਰਾਲ ਅਬਲੇ ਇਸਲਾਮ ਵਾਲਿਆਂ ਦੇ ਕਮੇਡੀਆਂ ਨਾਲ ਬਲੇ ਬੋਧਾਲਿਆ ਜੀ ਕਮੇਡੀਆਂ ਹੋਰ ਛੋਟੀਆਂ ਮਤਾਲੇ ਲੱਭ ਜਾਂਦੇ ਨੇ ਉਹਦੇ ਨਾਲ ਕੁਝ ਨਹੀਂ ਬਣਨ ਵਾਲਾ ਸਾਰੇ ਫਸੇ ਬੈਠੇ ਨੇ ਠੀਕ ਹੈ ਜੀ ਜਿਸ ਹੋਵੇਂ ਆਪ ਤੇ ਹਾਲ ਤੇ ਸਲਾਵਾ ਸਤਿਗੁਰ ਚਰਨ ਇਹ ਕੌਣ ਲਾ ਰਿਹਾ ਜੀ ਸਤਿਗੁਰ ਦੇ ਚਰਨਾਂ ਨੂੰ ਇਹ ਪਰਮੇਸ਼ਰ ਲਾ ਰਿਹਾ ਤੇ ਤੂੰ ਹੋਰ ਤਪਾਇਨਾ ਲੱਭੇ ਇਹ ਹੁਣ ਕਿਹਨੂੰ ਕਿਹਾ ਹੋਰ ਪਾਇ ਬਤੇ ਦੇ ਦੁਨੀਆਂ ਦੇ ਵਿੱਚ ਦੁਕਾਨਦਾਰ ਆ ਨੀ ਦਾ ਕਰਤਾ ਬਨ ਹੋਵੇ ਉਹ ਤੇ ਬਿਨੋ ਨੀ ਗੱਲ ਵੱਡੀ ਉਹ ਦੱਸੂਗਾ ਇਹ ਤਾਂ ਚੁਰਾਣੇ ਦਾ ਤਰੀਕਾ ਇਹ ਬਨਾਸ਼ੀ ਦੇ ਨਾਲ ਜੁੜਨਾ ਹੈ ਹਾਂ ਬਣਾ ਜੇ ਤਾਂ ਹੋਣਾ ਤਾਂ ਕਰੂਗਾ ਤੇ ਦੂ ਇਹਨਾਂ ਗੱਲ ਦੇ ਪਾਸੇ ਆਪਨੇੜੀ ਤੇਰੇ ਬਾਦੂ ਗੱਲ ਨਹੀਂ ਬਾਸੀ ਵਾਲੇ ਕੋ ਜਾਏਗਾ ਆਪਣੇੜੀ ਤੇਰੇ ਬਾਦੂ ਤੇ ਮੇਰੇ ਕੋ ਦਾ ਆਹੀ ਕੋਸਾ ਭਾਈ ਬਲਦਿਆ ਤੂੰ ਬਾਲਾ ਠੀਕ ਹੈ ਜੀ ਇੱਥੇ ਦੂਸਰੀ ਪੜਵੀ ਸਮਾਪਤ